ਸਾਰ ਕੇ ਸੰਗੇ ਅਗੋਚਰ ਮਿਲੇ ਸਾਧ ਕੇ ਸੰਗੇ ਵਚਨ ਮਿਲ ਅਗੋਚਰ ਜਿਹੜਾ ਨਾ ਬੁੱਧੀ ਤੋਂ ਭਰੇ ਆ ਅਗੋਚਰ ਨਫਜ਼ ਬਹੁਤ ਇੰਪੋਰਟੈਂਟ ਹੈ ਇਹ ਅਗੋਚਰ ਤੇ ਆਖੇ ਲੋਕ ਤੇ ਰੁੜ ਕੇ ਸਾਰੀ ਵਿਦਵਾਨ ਕੋਈ ਹੋਰ ਸਾਧ ਅਗੋਚਰ ਅਗਰ ਦੇ ਵਿੱਚ ਅਗੋਚਰ ਚਰ ਹੁੰਦਾ ਚਰਨਾ ਖਾਣਾ ਉਹ ਮਿਟਦਾ ਜਿਹੜਾ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਜਦ ਨਾਮ ਦੀ ਭੁੱਖ ਜਾਗਦੀ ਹੈ ਤਾਂ ਇਹ ਮਿਟਦੀ ਹੀ ਨਹੀਂ ਹੈ ਇਹ ਜਿਹੜਾ ਤਤ ਗਿਆਨ ਹੈ ਇਹ ਨਾਲ ਦੀ ਭੁੱਖ ਮਿਟਦੀ ਹੈ ਨਾ ਤਤ ਗਿਆਨ ਮੁਕਦਾ ਇਹ ਗੋਚਰ ਅੰਗੇ ਤੋਂ ਕੇ ਜਨਾ ਵਧੀ ਚੱਦੀ ਜਾ ਉਦੋਂ ਇਹ ਲੰਬੀ ਕਈ ਆਮ ਤੌਰ ਤੇ ਇਕੱਠੇ ਹੀ ਹੁੰਦਾ ਗਾਮ ਉਹ ਚੱਲਦਾ ਹੋਚਰੇ ਹੋਚਰ ਇਕੱਠਾ ਹੁੰਦਾ ਉਹ ਹੋਚਰ ਉਹ ਚੀਜ਼ ਆ ਜੋ ਜਦੋਂ ਇਹ ਗਿਆਨ ਹੈ ਜਿੰਨਾ ਮਰਜੀ ਇਹਨੂੰ ਪ੍ਰਾਪਤ ਕਰ ਮੁਖਦਾ ਹੀ ਨਹੀਂ ਹੈ ਨਾ ਇਹਦੇ ਪ੍ਰਾਪਤ ਕਰਨ ਦੀ ਭੁੱਖ ਪੜਦੀ ਹੈ ਜਾਏ ਬੁਖਦਾਰ ਉੱਚਾ ਤੇ ਉੱਚਾ ਬਗੋਂ ਇਹ ਗੋਚਰ ਹੈ ਅੱਗੋਂ ਰੋਜ਼ ਮਿਲਦਾ ਚੱਲੂ ਇਹ ਜਿਹੜਾ ਮਾਣਾ ਨਾ ਮਾਣੋ ਇਹਦਾ ਪਤਾ ਕਿਸ ਬਾ ਇਹ ਰੋਜ਼ ਜਿਹੜਾ ਸੀ ਨਾ ਅ ਬਿਰਗ ਦੀ ਗੱਲ ਦਿੱਤੀ ਹੋਈ ਆ ਚੱਲ ਹਾਂ ਜੋਰੀ ਉਹ ਕੋੰਗਰੀ ਖਾਈ ਜੋਰੀ ਫਿਰ ਗਾ ਬੂਰੀ ਖਾਈ ਜੋ ਨਵੀਂ ਫੋੜ ਫੁੱਟਦੀ ਐ ਨਾ ਉਕਰ ਅੰਕਰ ਫਿਰ ਉਹ ਨੂੰ ਖਾ ਕੇ ਰਾਜੀਆ ਜੇ ਕਿਹਾ ਖੇਤ ਆਲਾ ਹੋਵੇ ਆਇਆ ਉਹ ਹੀ ਇਹ ਵੀ ਨੁਮਾ ਗਿਆ ਖਾ ਕੇ ਰਾਜੀਆ ਰੋਜ ਪਰਾਨਾ ਦਾ ਫਿਰ ਉਹ ਪ੍ਰਾਨੇ ਕਹਾਣੀਆਂ ਸੁਆਈਆਂ ਤੇ ਲੋਕ ਜਾਂਦੇ ਹੀ ਹਟ ਕਣਦਾ ਛੜੇ ਪੱਤੇ ਉਹ ਹੀ ਰੱਖ ਦਿੰਦੇ ਪੂਰੇ ਸਾਡੇ ਸੁੱਕੇ ਛੱਕੇ ਜੇ ਉਹ ਸੁੱਕੇ ਕੇ ਪੂਰੇ ਅਸਿਰ ਵੀ ਹਾਂ ਕਿ ਕਬੂਨ ਚੋਰੀ ਜਾਨਾ ਖੰਦਾ ਹੈ ਇਹ ਗਿਆਨ ਚੋਰੀ ਵੀ ਖਾ ਜਾਂਦਾ ਕਹਿਣਾ ਮਤਲਬ ਹੈ ਜਿਹੜਾ ਗਿਆਨ ਆ ਨਾ ਸੰਸਾਰੀ ਗਿਆਨ ਨਮਾ ਹੋਵੇ ਉਹਦੀ ਚੋਰੀ ਹੁੰਦੀ ਹੈ ਸੰਸਾਰ ਚ ਕੋਪਰੀਆਂ ਦੇ ਜੋ ਚੀਜ਼ ਆ ਬਲੂ ਬਣਾਉਂਦੀਆਂ ਨੇ ਉਹ ਸੀਕਰੈਟੀਆਂ ਨੇ ਜਿਹੜੇ ਨਵੇਂ ਖੋਜਦਾਰ ਨਹੀਂ ਨਾ ਕੋਪਰੀ ਆਪਣੀ ਸਿਕਰੈਸਿਟੀ ਨਹੀਂ ਰੱਖਦੀ ਉਹਨੇ ਟੈਕਨਿਕ ਸੀ ਹਾਂ ਟੈਕਨਿਕ ਜਿਹੜੀ ਗਿਆਨ ਚੋਰੀ ਹਦਾ ਸਾਧਕੇ ਸੰਗੀ ਅਗੋਚਨ ਮਿਲੇ ਸਾਧਕੇ ਸੰਗੀ ਅਗੋਚਨ ਮਿਲੇ ਜਿਹੜਾ ਅਗੋਚ ਹੈ ਉਹਦੇ ਨਾਲ ਸੰਗੀ ਨੂੰ ਸਾਧਕੇ ਮਿਲਦਾ ਹੈ ਸਾਧਕੇ ਸੰਗ ਨਾਲ ਨਹੀਂ ਬਣਨਾ ਅਗੋਚ ਅਗੋਚਨ ਬਣਨ ਬਾਅਦ ਸੰਗੀ ਤੋਂ ਸਤਲੂ ਹੋਊਗਾ ਸੰਗੀ ਨੂੰ ਸਤਲੂ ਹੀ ਹੋਊਗਾ ਬਸ ਅਗੋਚ ਨਹੀਂ ਨਹੀਂ ਬਣਦਾ ਹਾਂ ਦੇਖੋ ਪਹਿਲਾ ਪਤਾ ਹੈ ਸਾਧੀ ਸੁਖਤਨ ਸਾਧੀ ਸੰਗਤਾਂ ਨਹੀਂ ਮਿਲਣਾ ਸੰਦੀ ਨੂੰ ਸਾਧਣਾ ਪੈਣਾ ਸਾਧਨ ਦੇ ਵਿੱਚ ਕਹਿਣਾ ਮਤਲਬ ਇਹ ਹੈ ਜੇ ਤੁਸੀਂ ਸਾਧ ਤੇ ਸੰਗਤ ਕੀਤੀ ਆਪਣੇ ਮਨ ਨੂੰ ਵੀ ਸਾਧ ਸਾਧਨ ਵਿੱਚ ਆਉਗਾ ਸਾਧ ਬਣਾਉਣਾ ਪਊਗਾ ਤਾਂ ਕੋਚਰ ਫਲੂਗਾ ਕਿਤੇ ਕੌਂ ਵੀ ਹੁੰ ਜਾਂਦੀ ਸਾਧੀ ਸੁਖਤ ਮਿਲ ਗਈ ਤੇ ਆਪੇ ਵੀ ਸਭ ਕੁਝ ਇਦਾਂ ਹੋ ਜੀਣਾ ਕਹਾਂ ਲਾਈਂ ਫਿਰ ਬਦਲ ਫਿਰ ਬਦਲ ਨਾ ਦੀ ਨਾਲ ਸੁਝਦੀ ਜੇ ਜਦੋਂ ਉਹ ਗੱਲ ਵਿਚਾਰ ਆਪਾਂ ਪਹੁੰਚ ਗਏ ਉਹਦਾ ਕਸੂਰ ਦੀ ਕੋ ਲੋੜ ਨਹੀਂ ਉਹਦਾ ਬਾਬਾ ਜੀ ਨੇ ਹੱਥ ਰੱਖ ਦੇਣਾ ਸਿਰ ਤੇ ਬਾਹ ਫੜ ਕੇ ਲੈ ਜਾਣਾ ਚਾਰ-ਸਾਹ ਹੋ ਜੀਏ ਤੇ ਜਾਂ ਕੁਝ ਨਹੀਂ ਆਗਾ ਮਨ ਆਪਣਾ ਫੇਰ ਵੀ ਸਾਧਨ ਪੜ੍ਹਣੀ ਏ ਉਹ ਸਾਧਨ ਦੀ ਵਿਧੀ ਉਹਨੂੰ ਪਤਾ ਦੱਸ ਦੂਗਾ ਦੱਸ ਦੱਸਦਾ ਸਾਧਨ ਆਪ ਨੂੰ ਪੜ ਆ ਗੱਲ ਐ ਇਥੇ ਆ ਕੇ ਉਹ ਗੋਚਰ ਦੀ ਜੇ ਪ੍ਰਾਪਤੀ ਹੈ ਮੁਕਤੀ ਹੈ ਦੀ ਪ੍ਰਾਪਤੀ ਹੋਇਆ ਗੋਚਰ ਨਾਲੇ ਮੁਕਤੀ ਹੈ ਇਹ ਤਾਂ ਬੋਲ ਚ ਲੈ ਐਨਾ ਲੱਦ ਦੇਣਾ ਇਹਨੂੰ ਤੇ ਖਰਕਾ ਤੇ ਤਾਂ ਛੋਟਾ ਜਾਂ ਉੱਪਰ ਰੋਜ਼ ਲੱਦੀ ਜਾਣੇ ਬੰਦੇ ਤੇ ਲੱਦੀ ਜਾਣ ਜੇ ਉਹਨਾਂ ਜਿੰਤਣ ਇਹਦੇ ਤੇ ਜਿਹੜਾ ਲੱਦਿਆ ਹੋਇਆ ਨਵਾਂ ਨਾਲ ਲੱਦਣਾ ਸ਼ੁਰੂ ਕਰਤਾ ਫਿਰ ਉਹਨਾਂ ਐ ਕਪੈਸਿਟੀ ਹੋ ਜਾਂਦੀ ਐ ਦੇਖੇ ਕਪੈਸਿਟੀ ਹੋ ਜਾਂਦੀ ਐ ਤੇ ਤਾਕਤ ਉਹਦੀ ਆ ਜਾਂਦੀ ਐ ਇਹਦੀ ਤਾਕਤ ਵਾਜ ਜਾਂਦੀ ਹੈ ਪਾਰ ਛੱਡ ਦਿੰਦਾ ਫਿਰ ਬੜੀ ਕੰਮ ਆ ਜਾਂਦਾ ਕਿਤੇ ਰੋਜੇ ਲੱਤ ਨੂੰ ਚਾਹੀਦਾ ਤੇ ਦੁਨੀਆ ਤੇ ਜੋ ਹੋ ਸਕਦੀ ਹੈ ਕਿਤੇ ਪਾਸੇ ਹੋਰ ਖਿਆਲ ਜਾ ਸਕਦਾ ਇਹ ਲੱਦੇ ਹੀ ਲੱਦੇ ਜਦ ਉੱਪਰ ਨਾਦਾ ਜਿਤਨਾ ਜਾਣਨ ਫਿਰ ਅਸਲ ਵਿੱਚ ਇਹ ਨੂੰ ਰਾਸ ਆਪ ਹੀ ਆਉਣ ਲੱਗ ਜਾਂਦਾ ਜਰਾ ਖਾਉਂਦਾ ਖੁਰਾਕ ਬੜੀ ਦਬਰੂਪ ਕੇ ਦੀ ਕਾ ਪੋਸ਼ਣ ਗਿਆਨ ਫਿਰ ਆਪੀ ਲਿਆ ਦੇਦੇ ਫਿਰ ਲੋਕਿਆ ਹੀ ਰੰਦਾ ਬਲੂਰ ਕੋ ਨਹੀਂ ਹੋਈਆ ਸੁਭਾਏ ਬਣ ਜਾਂਦਾ ਕੋਈ ਓਥੀ ਵਾਲੀ ਫਿਰ ਸੁਭਾਏ ਬਣ ਜਾਂਦਾ ਕੁਝ ਗੱਲ ਨਾ ਐਸੀ ਨੇ ਕਿ ਸ਼ੁਰੂ ਚ ਸ਼ੁਰੂ ਤੱਕ ਲਾਉਣੇ ਪਉਦੇ ਸੱਜੇ ਨਾਮ ਕੀ ਲਗਾ ਭੂਤ ਫਿਰ ਤੂ ਤਾਂ ਕਲ ਨਹੀਂ ਬਹੁਂ ਗਾਂ ਆ ਆਪੇ ਲੱਗੇ ਰ ਸਾਦ ਕੇ ਸੰਗੀ ਸਦਾ ਪਰ ਫੁੱਲੇ ہاں ਦੇਖੋ ਸਾਦ ਕੇ ਸੰਗੀ ਉਹ ਤਾਂ ਹੁੰਦਾ ਜਿਵੇਂ ਜਾਨ ਪਰ ਫੁੱਲੇ ਕੀ ਥੱਲੇ ਜਿਹੜੇ ਫੁੱਲ ਆ ਇਹਨੂੰ ਨਵੀਆਂ ਕਣੀਆਂ ਨੂੰ ਹੋਰ ਆ ਜਾਂਦੇ ਨੇ ਜੇ ਉੱਤੇ ਫੁੱਟਦੀਆਂ ਨੇ ਉਹੜੀਆਂ ਦਾਹਾਂ ਨਵੀਆਂ ਫੁੱਟੀਆਂ ਨੂੰ ਹੋਰ ਫੁੱਲ ਆ ਜਾਂਦੇ ਨੇ ਉਹ ਤੇ ਫੁੱਲ ਹੋਰ ਲੱਗੀ ਜਾਂਦੇ ਨੇ ਫੁੱਲ ਫਲ ਤੇ ਲਗੜ ਵੀ ਫਲ ਵੀ ਲਗੜ ਕੇ ਉਹ ਹੋ ਜਾਂਦਾ ਹੈ ਗਿਆਨ ਫਲ ਆ ਹੀ ਜਾਂਦਾ ਹੈ ਜਿੰਨਾ ਕਹੇ ਗਿਆਨ حاصل ਆਵੇ ਬਸ ਪੰਚਮ ਸਤਿਗੁਰ ਸੰਗੀ ਆਵੇ ਬਸ ਆਵੇ ਬਸ ਪੰਚਮ 55 ਜਿਹੜਾ ਪੱਜੇ ਬਕਾਦ ਨੇ ਇੱਕ ਡਰੋਵਜ ਹੋ ਜਾਂਦੇ ਨੇ ਪਰ ਤੋਂ ਵਾਸ ਮਨ ਸਾਜਵੇ ਦੇ ਬੁਨ ਸਾਜ ਬੁਨ ਸਕਿਆ ਹੈ ਮਾਨਾ ਇਹ ਪੰਜਾ ਦੇ ਕਮਾਂਡ ਕੰਟਰੋਲ ਕਰਦੇ ਕੰਟਰੋਲ ਕਰ ਲੈਣੇ ਸਾਡੇ ਨੂੰ ਇਹ ਆਊਟ ਆਫ ਕੰਟਰੋਲ ਰੱਖੇ ਦੇ ਪੱਜੇ ਹੈ ਪਹਿਲਾਂ ਲੋਭ ਆਹ ਆਹਾਂ ਭਾਂਡਾ ਤੁਸੀਂ ਭਰ ਨਹੀਂ ਸਕਦੇ ਲੋਭ ਨਾਲ ਨਹੀਂ ਕਰ ਸਕਦੇ ਸਾਰ ਦਾ ਲੋਭ ਨਹੀਂ ਕਰਨਾ ਜੇ ਅਸੀਂ ਲੋਭ ਜੇ ਨਹੀਂ ਕਰਨਾ ਤਾਂ ਅਸੀਂ ਉਹਦੇ ਚ ਉਹ 1 ਲੱਖ ਰਹਿ ਜਾਗਾ ਸਜਗ ਤਾਂ ਕਰ ਸਕਦੇ ਹਾਂ ਸਜਮੇ ਖਰਚ ਘਟਾ ਲਓ ਆਪਣਾ ਨਿਯਾਬਲਾ ਸੱਚ ਕਰ ਦੋ ਚਾਦਰ ਆ ਉਹਨੇ ਬਾਜ਼ਾਰ ਤੋਂ ਸੰਜਮੀ ਬਦਾ ਪਾਣ ਲੋਭ ਦੀ ਜਗ੍ਹਾ ਸੰਜਮ ਆ ਗਿਆ ਸਾਡੇ ਕੋਲ ਬਸ ਗੋਆ ਨਗ ਲਿਆ ਲੋਭ ਕਰਨਾ ਨਹੀਂ ਸਜਮੇ ਰਹਿਣਾ ਜੇ ਸੰਜਮ ਨਹੀਂ ਰੱਖਾਂਗੇ ਪਰੇਸ਼ਾਨੀ ਪੈਦਾ ਹੋ ਜੂ ਪਰੇਸ਼ਾਨੀ ਪੈਦਾ ਹੋਊ ਉਹ ਖਰਾਬ ਹੋ ਜੂ ਬੈਰੜ ਖਰਾਬ ਹੋਊ ਤੇ ਇਦਾਂ ਦੋ ਵਾਰ ਸਜਾਉ ਸਮਝੂਗਾ ਰਾਸ਼ਟਰੀ ਗਰੀਬੀ ਬੇਸ ਹਾਂ ਸਾਰੇ ਆਪਣੀ ਸੁਣਦੀ ਹੈ ਨਾ ਸਾਰੀਆਂ ਸਰਕਾਰਾਂ ਸਾਰੇ ਕਹਿਣ ਲੱਗੇ ਵੀ ਖਰਚੇ ਘਟਾਓ ਮੋਦੀ ਦਾ ਵੀ ਹੋ ਗਿਆ ਕਹਿਣ ਸਾਰੇ ਕਹਿ ਰਹੇ ਆ ਆਪਣਾ ਘਟਾਉ ਜਾ ਦੇਖਾਂਗੇ ਆਪਣਾ ਸੁਰਗ ਬਣਾ ਰਿਹਾ ਉੱਥੇ ਉਹ ਜਿਹੜੇ ਤੱਕ ਸੁਰਗ ਉਹ ਪੈਦਾ ਨਹੀਂ ਹੋ ਤੁਸੀਂ ਕਿੰਨਾ ਪੈਦਾ ਉਹ ਠੀਕ ਹੈ ਲੋਕਾਂ ਨੂੰ ਵੀ ਓਖਾ ਹੈ ਉਹ ਦੂਗਾ ਵਾਸਤੇ ਖਰਚਾ ਵੀ ਹੁੰਦਾ ਹਾਂਜੀ ਪਾਚ ਸਰਸਾ ਤੇ ਖਰਚਾ ਰੋਜ਼ ਹੁੰਦਾ ਪਰ ਇਹ ਤੇ ਪਤਾ ਲੱਗੂਗਾ ਹੋ ਜਾਣਾ ਸੁਰਗ ਇਹ ਉਹ ਬੜੀ ਉਹ ਵੀ ਮਰੂ ਬਹੁਤ ਤੇ ਬਾਹਰੋਂ ਤਾਂ ਨਹੀਂ ਮਰੂ ਸੀ ਹਾਂ ਉਹ ਕੋਈ ਸਭ ਵੀ ਵਿਸਪੋਰਟ ਹੋ ਸਕਦਾ ਉਤੋਂ ਦੀ ਬਰਵੇਂ ਨਾ ਪਰ ਕਿਤੇ ਤੋਂ ਦੀ ਸਾਈਡ ਤੋਂ ਲਿਆਏ ਚਲੋ ਤੋਂ ਸੁਰਗ ਲਿਆ ਕੇ ਬਾਅਦ ਦੇ ਵਿੱਚ ਕੀ ਇਹਦਾ ਦੁੱਖ ਹੋਣਾ ਬਾਅਦ ਚ ਪਤਾ ਲੱਗਦਾ ਹੈ ਇਹਦੀ ਬੁੱਧੀ ਜੀ ਰੋਣ ਹਾਂਜੀ ਸਾਥ ਸਗੀ ਅਮਰ ਤਲਸ ਪੁੰਚਾ ਸਾਥ ਸਗੀ ਅਮਰ ਤਲਸ ਪੁੰਚਾ ਜਿਨ੍ਹਾਂ ਨੇ ਆਪਣਾ ਸੰਗੀ ਸਾਥ ਲਿਆ ਉਹ ਚਾਹਿਆ ਨਾ ਪੁੰਚਾ ਮੈਂ ਆਪਣਾ ਸੰਗੀ ਸਾਥ ਨੇ ਅਮਰ ਤਲਸ ਪੁੰਚਿਆ ਉਹ ਮਨ ਸਾਦੇ ਸੇ ਬਾਦੀ ਖਤਰ ਮਨ ਨੂੰ ਤਾਂ ਕੌੜਾ ਲੱਗਦਾ ਅਮਰ ਸਾਧਿਆ ਤਾਂ ਕਿਹਾ ਇਹ ਕੌੜਾ ਲੱਗਦਾ ਖੰਡਾ ਦੀਆਂ ਇਹ ਤੇ ਕਹੇ ਮੈਨੂੰ ਲੱਗਦੀ ਇਹ ਨੂੰ ਜੇ ਮੋਂ ਦੇ ਕੋ ਪੁੱਛੇ ਜਾਂ ਸਾਧਿਆ ਜਾਂਦਾ ਫੇਰ ਸਾਰ ਹੋਏ ਸਭ ਕੀ ਰੇਨ ਆਹ ਸਾ ਹੋਏ ਸਭ ਕੀ ਰੇਨ ਜਿਹੜਾ ਸਕੀਤ ਸਾਜਾ ਨਾ ਜਾਦਾ ਜਾ ਸੰਗੀ ਸਾਚੰਦਾ ਬਿਸਾਰਨ ਤੇ ਰਹਿਣਾ ਸਾਰਿਆਂ ਦਾ ਦਾਸ ਰੇਰ ਦਾਸ ਹੈ ਸਾਧਕੇ ਸਗੀ ਮਨੋਹਰ ਬੈਨ ਸਾਧਕੇ ਸਗੀ ਜਦ ਮਨ ਸਾਚੰਦਾ ਹੈ ਮਨੋਹਰ ਤੇ ਮਨੋਹਰ ਤੇ ਸੁਧੇ ਹੀ ਹੁੰਦੇ ਨੇ ਬਨੋ ਹਰ ਬੰਦੂ ਹਰ ਕਰ ਬਣ ਰੇ ਰਬਾ ਦੇਣਾ ਬੰਦੂ ਵੀ ਚੰਗਾ ਬੰਦੂ ਹੋਣ ਵਾਲਾ ਹੁੰਦਾ ਹੈ ਬੋਧ ਹਾਰਣ ਬੋਧ ਹੋਰ ਬਿਸਰਾ ਬਾੰਦ ਬੋਧ ਹਾਰਣ ਬੋਧ ਹੋਰ ਕ੍ਰਿਸ਼ਤ ਚਰਾਵਤ ਕਉ ਉਥੇ ਕ੍ਰਿਸ਼ਨ ਘਾਣ ਚ ਰਹੰਦਾ ਜਿੱਤੇ ਬੋਧ ਹੋਰ ਬਾੰਦ ਜਿੱਤੇ ਬਾਂਸਰੀ ਫਿਰ ਰਾਮ ਬੇਣ ਬਚਦੀ ਹੈ ਰਾਮ ਬੇਣਾ ਤੇ ਕ੍ਰਿਸ਼ਣ ਦੀ ਮੰਗ ਕ੍ਰਿਸ਼ਣ ਦਾ ਗੌਜਰਾਮ ਦਾ ਨਾਮ ਬੇਣਾ ਆਹ ਨਾਮ ਬੇਣਾ ਪਿਆਉਂਦਾ ਹੈ ਕ੍ਰਿਸ਼ਣ ਤੇ ਗੌਜੇ ਕ੍ਰਿਸ਼ਣ ਗੌਜੇ ਜਿਹਦੇ ਉਹਦੀ ਖੁਰਾਕ ਹੈ ਜਿਹੜੀ ਆਤਮਾ ਦੀ ਖੁਰਾਕ ਹੈ ਆਤਮਾ ਨੂੰ ਲੋੜ ਹੈ ਆਤਮਾ ਖਰਾਬ ਉਹ ਦਿੱਤਾ ਹੈ ਆਤਮਾ ਦੀ ਖਰਾਬਸਾ ਹੈ ਮਨ ਮਨ ਤੇ ਸ਼ਰਮਾਨ ਪਉਂਦੀ ਜਿਹੜੀ ਉਹ ਚੰਗੀ ਰੱਖਦੇ ਉਹ ਚੀਜ਼ਾਂ ਦੇ ਉਹਨੂੰ ਪ੍ਰਸੰਦ ਆਉਂਦੀ ਹੈ ਇੱਥੇ ਕੇਦਨ ਕੋਈ ਗੱਲ ਪਸੰਦ ਨਹੀਂ ਕੇਦਨ ਕੋਈ ਨਹੀਂ ਹੋਸ ਬੈਂਡ ਹੈ ਵਜੋਂ ਹੋ ਆਹ ਆਹ ਅਸ਼ਾਦ ਕੇ ਸੰਗੀਨ ਕਦੋਂ ਹੁਤਾਵੇ ਆਹ ਮਾਤਲਬਾ ਜਿਹੜਾ 36 ਸੱਦੇ ਆ ਮਾਨੇ ਉਹ ਪੈਸਾ ਨੜਦਾ ਨਹੀਂ 36 ਫਿਰ ਵੀ ਪੈਸਾ ਛੱਡਦਾ ਨਹੀਂ ਹੈ ਫਿਰ ਉਹਦੇ ਅੰਦਰ ਅਗਰ ਜੇ ਨਹੀਂ ਭਜਦਾ ਦਾ ਸਤਿ ਸਾਕੀ ਸਾਹਿਬ ਦਾ ਉਹਦੀ ਉਹਦਾ ਫਿਰ ਧਿਆਨ ਕਿਤੇ ਪੈਦਾ ਦੀ ਦਾ ਮਾਨੇ ਕੰਟਰੋਲ ਹੋ ਜਾਂਦਾ ਉਹ ਟਾਰਗੇਟ ਤੇ ਰਹਿੰਦਾ ਹੈ ਨਾ ਆਪਣੇ ਸਾਧੂ ਸੰਗੀ ਇਸ ਕਰਕੇ ਬਰਦੂ ਸਾਧਲਾ ਜ਼ਰੂਰੀ ਹੈ ਸਾਧ ਸੰਗੀ ਬਰਦੂ ਸਾਧਲਾ ਹੈ ਤੇ ਆ ਨਾ ਅਸਰ ਚ ਅਗੇ ਦੋਏ ਆਖਾ ਜਾ ਬਣੇ ਕਿਰਿਆ ਵੀ ਆ ਰਿਹਾ ਉਹ ਤਾਂ ਆਪਾ ਦੇ ਖੜਾਣਾ ਕਰ ਲੋ ਕਿਰਿਆ ਤੇ ਫੇਲਾਉਣੀ ਸਾਡਾ ਇਹ ਹਰ ਸਭੀ ਉਸੇ ਆਦਮੀ ਕੇ ਜੀਉਂ ਆਦਮੀ ਆਸਲਾ ਹੋ ਗਏ ਕੇ ਸਦੋ ਜੀ ਬਟ ਇਹ ਤਾਂ ਅਜੇ ਬੇਦਵਾ ਪ੍ਰੈਕਟੀਕਲੀ ਦੇ ਪ੍ਰੈਕਟੀਕਲ ਪੋਸੀਬਲ ਹੈ ਇਹਦਾ ਤਾਂ ਜਿਹੜਾ ਸਾਦੀ ਸੰਗਤ ਨਾਲ ਆਪਣਾ ਦੋਨ ਸਬੰਧ ਸਦੋ ਕੇ ਜਿਹਨਾਂ ਚਾਹ ਆਪਣਾ ਬੰਦੀ ਸਦਿਆ ਇਹ ਦਲ ਹੈ ਆਤ ਉਦੋਂ ਦੇਖਣਾ ਕਿ ਅਰਥ ਕੀ ਇਥੇ ਦੀ ਲਗੂ ਦਾ ਲਾ ਬਸੋਈ ਦੇ ਇਸ ਘਰ ਚ ਤੇ ਬੇਨੂਗਾ ਤਣ ਲੱਗਦੀ ਆ ਪਰਵਾਲੀ ਕਰ ਕੱਲੀ ਬਿਆ ਕਾਡੋ ਨੀ ਜਸਾ ਚ ਸੁਖਤਮਨ ਤੋਂ ਸੋਚ ਜਿ ਕਿਹਾ ਮਾਇਆ ਦੇ ਭਿੰਨ ਇਹ ਹੋ ਜਾਂਦਾ ਹੈ ਇੱਕ ਬੰਨ ਹੋ ਜਾਂਦਾ ਮਾਇਆ ਦੇ ਭਿੰਨ ਸਾਧਕੇ ਮਾਇਆ ਦੇ ਭਿੰਨ ਮਾਇਆ ਕਰਦੇ ਨੋ ਗਿਆ ਇਹਦਾ ਮਤਲਬ ਹੈ ਮਾਇਆ ਹੀ ਛੱਡ ਗਿਆ ਫਿਰ ਬੰਦੇ ਉਹ ਸਾਧਨ ਸਾਧਨ ਸਾਧਨ ਕਹੀ ਗਏ ਆਇ ਤੇ ਦਾਤਾ ਵੀ ਆ ਜਨਾ ਮਾਇਆ ਦਾ ਤੂੰ ਅੱਲਾਹ ਕਰਤਾ ਮਾਇਆ ਤੋਂ ਉਹ ਖੜਾ ਕਰਤਾ ਸ਼ਰੀਰ ਦੇ ਵਿੱਚ ਰਹਿੰਦਾ ਹੋਇਆ ਵੀ ਸ਼ਰੀਰ ਦੇ ਨਾਲ ਜੁੜਿਆ ਹੋਇਆ ਪੇਦੂ ਜਾਣੋ ਬਾਂਸ ਤੇ ਹੋ ਹਰਕਾ ਸੇਵਕ ਸੇਵਕ ਤਾਂ ਤੇ ਆਇਆ ਸੋਹਰ ਜਿਹਾਂ ਪੇਦੂ ਜਾਣੋ ਬਰ ਤੋਂ ਇਹਨਾਂ ਸਮਝੋ ਵੀ ਇਹ ਤੇਰੇ ਆ ਕੇ ਜਬ ਜਬ ਜਬ ਜਰੂਰ ਸੀ ਪਰ ਹੁਣ ਆਇਆ ਗਿਆ ਦੀ ਹੋਇਆ ਚੋਰ ਚੋਰ ਦਾ ਚੋਰ ਮਾਇਆ ਆਈ ਤੇ ਅਗਿਆਤ ਹੈ ਆਈ ਸਾਲ ਸੰਗੀ ਨਾਨਕ ਸੂ ਪ੍ਰਭ ਸੂ ਪਰਸਾਦ ਆਹ ਸਾਲ ਸੰਗੀ ਨਾਨਕ ਜਿਹੜਾ ਬੰਸੂ ਪਰਸਾਦ ਜਿਹੜਾ ਬਸ ਸਦਾ ਹੀ ਮਨਾਵਾਸੀ ਜਿਹਨਾਂ ਗਿਆ ਉਹਨੂੰ ਸਭ ਤੋਂ ਵੱਡੀ ਪ੍ਰਸੰਧਤਾ ਹੈ ਹੈ ਉਹ ਪ੍ਰਸੰਧ ਵਿਹਾਲ ਹੁੰਦਾ ਪ੍ਰਭ ਸੂ ਪਰਸਾਦ ਉਹਦਾ ਪ੍ਰਭ ਪ੍ਰਸਾਦ ਇਹਦਾ ਪਹਿਲਾ ਪ੍ਰਸਾਦ ਨੇ ਹੁਦਾ ਪਾਲਾ ਪ੍ਰਸੰਤਾ ਵਾਇਆ ਤੋਂ ਹੁਦਾ ਪਾਲਣ ਨੂੰ ਜਗਨ ਕੀ ਉਹ ਮਾਇਆ ਦੀ ਉਹਦੀ ਰੁਪਿਆ ਜੀ ਉਹ ਚੜਾ ਦੀ ਹੋਲੀਏ ਨਾ ਤੋਨੇ ਕੀ ਪ੍ਰਸਾਦ ਹੋਣ ਉਹ ਤਾਂ ਆਪਣੇ ਜਪ ਕਰਕੇ ਬੈਠਾ ਰਹੇ ਅੱਜ ਉਹ ਕਿ ਮੈਂ ਤੇਰਾ ਤਾਂ ਕਿੜਾ ਪ੍ਰਸਾਦ ਸੁਣਵਾ ਜੀ ਕਰਨਾ ਚਾਹਤਾ ਮਿਲ ਕੇ ਸਾਥ ਤੇ ਆਏ ਜਾਂਦੇ ਰਸਾ ਕਲੰਦਾ ਫਿਰ ਜਦੋਂ ਉਹ ਬਚਾ ਗਏ ਤਾਂ ਆਪਾਂ ਜਾ ਕੇ ਨੱਲਾ ਪ੍ਰਸਾਦ ਨੇ ਲੈ ਅੰਦਰ ਦੇ ਵੀ ਪ੍ਰਾਪਤ ਹੈ ਕਿ ਪ੍ਰਾਪਤ ਪ੍ਰਸਾਦ ਲੋਕਾ ਥੇਰੇ ਪ੍ਰਸਾਦ ਆ ਬੰਦੂ ਦਾ ਜਿਹੜਾ ਕੋਈ ਵਿੜ ਗਿਆ ਜਿੱਦੀ ਕੇ ਚਾਹਤਾ ਸੀ ਵਿੜਿਆਈ ਇਹਨੂੰ ਤਾਂ ਕਦੇ ਆਸਿਰ ਦੀਵੇਂ ਵਿੜਿਆਈ ਤਦੂ ਵਿੜ ਜੀ ਜਾਂ ਵਿੜ ਜਾਂਦੀ ਹੈ ਫਿਰ ਉਹ ਤਾਂ ਉਹ ਵੀ ਹੋ ਜਾਂਦਾ ਜਿਹੜੀ ਚੀਜ਼ ਆਸਿਰ ਹੋਊ ਮੜ ਜਾਏ ਉਹਦੀ ਹੋਰ ਪ੍ਰਸੰਤਾ ਚੀਜ਼ ਚੀਜ਼ ਕਿਹਦੀ